ਲੇਖਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿੰਕੀਆਂ ਕਰ ਕਿਰਪਾ ਪਗਧਾਰ ਲੇਖ ਨੂੰ ਮਿਟਈ ਜੋ ਲਿਖਿਆ ਕਰਤਾਰ ਇਹ ਉਹ ਲੇਖ ਨਹੀਂ ਮਿਟਿਆ ਜਿਹੜਾ ਜਿਹੜਾ ਸਰਤਾਲ ਦੇ ਕਰਤਾਰ ਨੇ ਆਪਣੇ ਉੱਤਰ ਲਿਖ ਲਿਆ ਕੋਈ ਨਹੀਂ ਮਿਟਾ ਸਕਦਾ ਸਰਕਾਰ ਬਾਤ ਅੱਛਾ ਕਰਤਾਰ ਅੱਧਰ ਬੈਠਾ ਹੈ। ਹੂੰ। ਇਹ ਕਰਤਾਰ ਦੇ ਗੁਣ ਲਿਆ ਨਾ ਕਬ ਕਬ। ਤਾਂ ਬੁੱਢੀ ਦੀ ਹੈ ਉਹਨੂੰ ਬਿਠਾ ਦੇ। ਬੁੱਢੀ ਦੀ ਹਸਤੀ ਦੀ ਹੈ ਉਹਨੂੰ ਘਹਿਰ ਵਿੱਚ ਵੀ ਨਹੀਂ ਕਰਦੂ। ਇਹ ਕਰਤਾਰ ਦੀ ਕੰਦਾ ਕਰਤਾਰ ਦਾ ਸਾਰਾ। ਉਸ ਟੈਣ ਦੀ ਲੈ ਇਸ ਕਰਕੇ ਦੁਖੀ ਵੀ ਉਹੀ ਹੈ। ਉਹਦੇ ਵੀ ਹੋਈ ਕਿਉਂ ਲਗਿਆ ਦਰਤਾਰ ਤੇ ਮੂਲ ਨੂੰ ਕਿਹਾ ਜੀ ਮੂਲ ਨੇ ਆ ਬੋਲੂ ਵੀ ਜਿਹੜਾ ਆਪਾਂ ਕਹਿੰਦੇ ਵਰਤੇ ਸਭ ਕੁਝ ਤੇਰਾ ਭਾਣਾ ਜੇ ਤੂੰ ਇਹ ਲੈ ਲਿਆ ਫੇਰ ਕਿਸੇ ਦੀ ਕੋਈ ਹਸਤੀ ਨਹੀਂ ਅੱਛਾ ਉਹਨ ਬੁੱਧੀ ਦਾ ਘੂਜੇ ਲੱਗ ਜਾਂਦਾ ਜਦੋਂ ਚਪਕਾਰ ਕੇ ਸਟੇਟੇ ਨਹੀਂ ਲੱਦਦਾ ਹੈ ਅੱਛਾ ਮੇਰਾ ਤਾਂ ਤਾਕਤ ਦੇ ਕੁਝ ਨਹੀਂ ਕੁਛ ਵੀ ਨਹੀਂ ਹੁੰਦੇ ਤਾਂ ਉਹਦਾਂ ਦਾ ਕਦੋਂ ਉਤਰਦਾ ਹੁੰਦਾ ਹੂੰ ਉਹ ਆਪੇ ਕਾਰਨ ਵੱਡਾ ਪੁਰਵ ਅਸੀਂ ਜਗਾ ਦੀ ਰਹੇ ਵੀ ਤੂੰ ਤੇੜ ਲੈ ਆਪੇ ਕਾਰਨ ਜੇ ਕੀਆ ਸਰ ਕਿਰਪਾ ਫਗਤਾ ਆਪੇ ਕਾਰਨ ਕੀਤਾ ਨੇ ਅਕਾਲ ਦਰਬ ਨੇ ਆਦਿ ਕੀਤਾ ਪੁਰਸੇ ਬਾਤੇ ਤੁੰਡ ਕਬਾਈ ਤਵੇ ਬੋਲਸ ਦੇਈ ਭਾਈ ਉਹਦੇ ਜਦ ਇਹ ਆ ਸਾਰਾ ਸਾਰਾ ਕਾਰਡੋ ਦਾ ਹੀ ਹੈ ਕਰਤਾਰ ਦਾ ਹੀ ਕਾਰਡ ਹੈ ਆਪਣਾ ਨੇ ਹਲ ਆ ਰਹੇ ਕੱਤੀwidehat ਅਈਓ ਉੱਚੇ ਉੱਪਰ ਪਚਾਰ ਉਪ ਕਰਤਾ ਉਹਦੇ ਕੋ ਉਹੀ ਵੱਡਾ ਉਹਦੀ ਵਡੀ ਜੋ ਉਹਦੇ ਵੱਡੀ ਕੀ ਜੋ ਵਡੀ ਆਈ ਜੋ ਕੱਚ ਪੈਲ ਦੇ ਕਿਲ ਦੇ ਚਾਈ ਇਹ ਕਰਤਾਰ ਵੱਡੇ-ਵੱਡਿਆਈ ਉਹਦੀ ਹੀ ਦੇ। ਉਹ ਆਪਣੀਆਂ ਨਾ ਇਸਤੇਮਾਲ ਨਹੀਂ ਕਰਦਾ। ਜਦੋਂ ਜਦ ਨਹੀਂ ਕਰਦਾ ਉਹਨਾਂ ਜਦ ਖਵਾਰ ਹੁੰਦਾ। ਇਹਨਾਂ ਜਦ ਆਪਣੀ ਪਾਵਰ ਦਾ ਇਸਤੇਮਾਲ ਨਹੀਂ ਕਰਦਾ ਉਹਨਾਂ ਜਦ ਖਵਾਰ ਹੁੰਦਾ। ਖਿਆਫੇ ਨਾ ਸਕੀਏ। ਜੋ ਭਾਵੇਂ ਤਿਉਂਸਾਰ। ਹਾਂ। ਕਰਤੇ ਆਤੋਂ ਡਿਆਈਆਂ। ਜੋ ਬਰ ਧੰਨਿਆ ਕਰਦੇ ਦੇ ਆਤਿਆ ਦੇ ਹਾਂ ਹਾਂ ਯਾਦ ਚਾਹ ਨੂੰ ਮੁਝ ਲੋ ਯਾਦ ਵਿਚਾਰ ਦੀ ਲੋੜ ਆ ਪੁੱਜਣ ਦੀ ਹਾਂ ਹਾਂ ਉਹਨਾਂ ਬਾਵਾ ਰਾਜਾ ਨਹੀਂ ਹੋ ਸਕਦਾ 1 ਮਿੰਟ ਵਾਸਤੇ ਵੀ ਜੇ ਉਹ ਏ ਲੇਕਿਨ ਫੇਰ ਦੇ ਸਕੀ ਐ ਜੂ ਭਾਵੇਂ ਜੂ ਭਾਵੇਂ ਜੇ ਉਹ ਬੰਦ ਅੰਦਰ ਲਾ ਉਹ ਨੂੰੜੀ ਕੋਈ ਮਡਾ ਇਸ ਸਟੈਂਡ ਕਿਤਲੇ ਉਹ ਕਿਸੇ ਦੀ ਸ਼ੁੱਭਤ ਨਹੀਂ ਆ ਮੰਦੀ ਪਰ ਇਹਦਾ ਜਿਹੜਾ ਆਪਾਂ ਆਮ ਅਰਥ ਲੋਕ ਕੀਤੇ ਜਾਂਦੇ ਕਰਤਾਰ ਦੇ ਅਰਥ ਲੈਣੇ ਆ ਪਰਮੇਸ਼ਰ ਵੀ ਜੋ ਲਿਖਿਆ ਹੋਇਆ ਉਹੀ ਹੋਊਗਾ ਉਹ ਫਿਰ ਸਾਰੇ ਖਜ਼ੂਰ ਜੀ ਦਾ ਕੋਈ ਇਸ ਦਾ ਤੇ ਹਜ਼ੂਰ ਹੈ ਕੋਈ ਦੁਨੀਆ ਦਾ ਤੇ ਕਰਤਾਰ ਦਾ ਹਜ਼ੂਰ ਹੋ ਗਿਆ ਸਾਰੇ ਉਹ ਨਾ ਦੇ ਸੰਤਾਂ ਦੇ ਅਰਥ ਨੇ ਆਪ ਬਚਣ ਦਾ ਆ ਵਿਚਾਰੇ ਬਣ ਕੇ ਨਾ ਦੂਤੇ ਜਾਏ ਹੋ ਅੱਛਾ ਜੀ ਆਪਣੇ ਤੋਂ ਸੁੱਤੇ ਕੋਈ ਵੀ ਤੇ ਕਰਤਾਰ ਦਾ ਮਤਲਬ ਭਾਵ ਹੈਗਾ ਵੀ ਆਪਣਾ ਮੂਲ ਜੋ ਹੀ ਲੇਖ ਲਿਖ ਲਿਆ ਉਹ ਮਿਟ ਨਹੀਂ ਸਕਦਾ ਹੈ ਜੀ ਕਰਤਾਰ ਹੈ ਵਰਗਟ ਕਰਤਾ ਤਾਂ ਇਹੀ ਹੈ ਠੀਕ ਹੈ ਜੀ ਤੇ ਜਿੱਥੇ ਕਹਿੰਦੇ ਕਰਤੇ ਹੱਤ ਵਡਿਆਈਆਂ ਉਹ ਹੈ ਵੀ ਹੈ ਠੀਕ ਹੈ ਵੜੇ ਕੀ ਵੜੀ ਵੀ ਇਹੀ ਹੈ ਹਮ ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਨਦਰ ਤੇਰੀ ਸੁਖ ਪਾਇਆ ਨਾਦ ਵਿਚਾਰ ਨਾਦ ਨੇ ਸਾਨੂੰ ਵਿਚਾਰ ਕੀਤਾ ਤੇਰੇ ਉਪਦੇਸ਼ ਦਾ ਜੋ ਵਿਚਾਰ ਕੀਤਾ ਉਹ ਜੋ ਸੁਖ ਮਿਲਿਆ ਉਹੀ ਤੇਰੀ ਨਜ਼ਰ ਦੀ ਮੈਨੂੰ ਜੋ ਉਪਦੇਸ਼ ਦਿੱਤਾ ਉਹ ਤੇਰੀ ਸੀ ਸੁਖ ਮਿਲਿਆ ਪ੍ਰਕਾਸ਼ ਠੀਕ ਹੈ ਜੀ ਮਨਮੁਖ ਭੂਲੇ ਪਛਮੁਹੇ ਮਨਮੁਖ ਭੂਲੇ ਪਛਮੁਹੇ ਇਨਾ ਗੁਰ ਵਿਚਾਰ ਕਰਨ ਲਈ ਉੱਪਰ ਗਏ ਜਿਹੜੇ ਵਨਮੁਖ ਨਹੀਂ ਵਿਚਾਰ ਕੀਤੀ ਉਹ ਬੂਲੇ ਪਤੂ ਜੇ ਪੁਰਖ ਨਦਰ ਨਾ ਆਵੇ ਕਰ ਕਹਿਆ ਜਾਏ ਬਲੇ ਹਾਰੀ ਗੁਰ ਆਪਣੇ ਜਨ ਹਿਰਦੈ ਦਿੱਤਾ ਦਿਖਾਈ ਜਿਹੜਾ ਪੁਰਖ ਨਦਰ ਨਹੀਂ ਰਿਹਾ ਦਿਖੇ ਨਹੀਂ ਰਿਹਾ ਗਿਆਨ ਦੇ ਦਰਿਆ ਪਕੜ ਤੋ ਹੀ ਫਰੇ ਹੈ ਬਾਰੇ ਕੀ ਕੋਲੀਏ ਕੀ ਦੱਸਿਆ ਜਾ ਸਕਦਾ ਕੀ ਕਥਨ ਕੀਤਾ ਜਾ ਸਕਦਾ ਜੋ ਪੁਰਖ ਨਜ਼ਰੇ ਨਹੀਂ ਆ ਰਿਹਾ ਉਹਦੇ ਬਾਰੇ ਕਿਆ ਕਥਨ ਕਥਨ ਕੀਤਾ ਜਾ ਸਕਦਾ ਕਿਆ ਕਿਹਾ ਜਾ ਸਕਦਾ ਪਰ ਭਲੇ ਆਈ ਬੁਰਾ ਆਪਣੇ ਹਿਰਦੇ ਦਾ ਦਿੱਤਾ ਦਿਖਾਏ ਮੈਂ ਤਾਂ ਇਹਨਾਂ ਕੋਈ ਤਾਂ ਐਸਾ ਮੇਨੂੰ ਮੇਰੇ ਹਿਰਦੇ 'ਚ ਉਹਦੇ ਦਰਸ਼ਨ ਕਰਾ ਦਿੱਤੇ ਤਾਂ ਦੋਲ ਪਏ ਹੂੰ ਹੂੰ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ ਕਲ ਕਰਤਾਰ ਦੀ ਕਹੀ ਨਾ ਕਰਤਾਰ ਨੂੰ ਕਹਿੰਦੇ ਤਾਂ ਗੱਲ ਕਹੀ ਹੈ ਕਰਤਾਰੇ ਪੁਰਖ ਹੈ ਪੁਰਖੇ ਹਜ਼ਰਤਾਨ ਹੋਰ ਕਿਥਾਲੇ ਹੀ ਪੁਰਖ ਨੇ ਪੁਰਖ ਹੈ ਗਉਂਦੀ ਠੀਕ ਹੈ ਉਹ ਕਿਤੇ ਦੇ ਰਹੇ ਸਾਰੇ ਕੋਈ ਪੂਰਨ ਪੁਰਖ ਹੈ ਕੋਈ ਕਰਤਾ ਪੁਰਖ ਹੈ ਪੁਰਖ ਕੋਈ ਵਿਆਲ ਪੁਰਖ ਹੈ ਪੁਰਖ ਸਾਰੇ ਠੀਕ ਹੈ ਕੋਈ ਸੱਤ ਪੁਰਖ ਹੈ ਉਹ ਸੱਤ ਪੁਰਖ ਹੈ